ਚਲੋਕ ਮਹਲਾ ਚੌਥਾ ਪਾਪਾ ਨਾ ਹੋਵੇ ਅੰਦਰੋਂ ਲੋਭੀ ਨਿਤ ਮਾਇਆ ਨੂੰ ਫਿਰੇ ਜਜਮਾਲਿਆ ਤਪਾ ਤਾਂ ਹੋਵੇ ਪਰ ਤਪਾ ਲੋਭੀ ਰਹੂ ਤਪ ਕੋਈ ਬੁਰੀ ਬਾਤ ਨਹੀਂ ਹੈ ਦੇ ਵਿੱਚ ਜੀਪ ਵੀ ਤਪ ਕਰਦਾ ਸੀ ਪਰ ਲੋੜ ਤੋਂ ਬਾਅਦ ਐਕਸੈਪਟ ਨਹੀਂ ਸੀ ਕਰਦਾ ਕੋਈ ਵੀ ਬੁਧਾਰ ਸਾਹਿਬ ਦਾ ਠੀਕ ਸਾਪੁਰੰਗ ਹੋਏਗਾ ਇਹੋ ਜਿਹਾ ਤਬਾਹੀਦਾ ਹੈ ਜਾਇ ਦੇ ਵਿੱਚ ਸੀਗਾ ਜੀ ਲੋੜ ਤੋਂ ਵੱਧ ਕੋਈ ਚੀਜ਼ ਐਸ਼ਕੀ ਕਰਦੀ ਪਰ ਜਿੰਨੇ ਲੋੜ ਪੰਲੇ ਨਹੀਂ ਵਗੜੀ ਜਮਾ ਕਰਕੇ ਕੋਲ ਨਹੀਂ ਰੱਖਣੀ ਕਿ ਕੋਲ ਰੱਖ ਲਾਂਗੇ ਤੇ ਅਨਮੋਲ ਦੇ ਜੂਗਾ ਵੀ ਪੀੜੀ ਕੋਈ ਕੁਝ ਨਾ ਚਲ ਜਾ ਤਬਾ ਤਬਪਾ ਹੋ ਜੂਗਾ ਇਹਨੂੰ ਹੈ ਹੋਵੇ ਅੰਦਰੋਂ ਲੋਭੀ ਨਿਤ ਮਾਇਆ ਨੂੰ ਫਿਰੇ ਜਸ ਮਾਲ ਲਿਆ ਮਾਇਆ ਨੂੰ ਫਿਰੇ ਜਸ ਮਾਲ ਲਿਆ ਇਹ ਮਾਇਆ ਫਕਾਤਰ ਜੇ ਫਜ਼ਾ ਜੇ ਤਬ ਮਾਇਆ ਵਾਸਤੇ ਤਪ ਉਹ ਹੋਏ ਸੋ ਤਪ ਉਹ ਨੂੰ ਫੜੀਏ ਤੇ ਦਾ ਤਬ ਉਹ ਹੌਲੇ ਟੋਕ ਕਰੇ ਜੀ ਉੱਧਰ ਲੋਭ ਹੈ ਬਾਹਰੋਂ ਫਿਰਦਾ ਦਾਤਾ ਤੋਂ ਮੇਰਾ ਜੱਜਮਾਨ ਯਜਮਾਨ ਯਜਮਾਨ ਦਾਤਾ ਹੈ ਯਜਮਾਨਾ ਨੂੰ ਪਤਾ ਹੈ ਹਾਂ ਇਹ ਮਨ ਵਾਸਤੇ ਕਿ ਹੈ ਨਾ ਜੀ ਕੋਈ ਬਾਹਰ ਤਪਾ ਜਿਹੜੀ ਖਾਸ ਕਹਾਣੀ ਸੁਣਾਈ ਹੈ ਉਹੀ ਜੀ ਤੇ ਕੋਈ ਗੱਲ ਨਹੀਂ ਹੈ ਬਾਹਰ ਹੋ ਸਕਦਾ ਹੈ ਪਰ ਆਪਾਂ ਦੇ ਤਾਂ ਮੰਨੂ ਕਿਹਾ ਹੈ ਉਹਦਾ ਵੀ ਮੰਨਿਆ ਪਾਪਾ ਉੱਥੇ ਵੀ ਮੰਨਿਆ ਤਾਂ ਮਾਨ ਕਰਕੇ ਚੱਪ ਕਰਦਾ ਬਾਹਰ ਵੀ ਠੀਕ ਹੈ ਕ੍ਰਿਸ਼ਤੀ ਲੋਹ ਵਾਲੀ ਹੈ ਇਹ ਉਹ ਖਾਸ ਕਰਕੇ ਕਿਸੇ ਨੂੰ ਪੰਡਤ ਨੂੰ ਇਹ ਕਹਿੰਦੇ ਆ ਜੋਗੀ ਨੂੰ ਕਿ ਉਹ ਇਸ ਤਰ੍ਹਾਂ ਕਰਦਾ ਸੀਗਾ ਤਾਂ ਇਹ ਲਿਖਿਆ ਪਰ ਇਹ ਹਰੇਕ ਤੇ ਹੀ ਪੰਕਤੀ ਲੱਗ ਸਕਦੀ ਅਰੇ ਵੀ ਲੱਗੋ ਠੀਕ ਹੈ ਜੀ ਇਹ ਤਾਂ ਜੋ ਸਾਥੀ ਅਗੋਂ ਦੇ ਸੱਧਿਆ ਸੱਤੇ ਦੀ ਪਿਖਿਆ ਲੈ ਨਾਹੀ ਪਿੱਛੋਂ ਦੇ ਪੁਛਤਾਇਕ ਹੈ ਆਣ ਤਪੈ ਪੁੱਤ ਵਿੱਚ ਬਹਾਲਿਆ ਅੱਗਾ ਨੇ ਸਦੇ ਆ ਸਦੇ ਤਫੇ ਰੂਹ ਵੀ ਆ ਜਾ ਭਾਈ ਤੂੰ ਵੀ ਔਰ ਸੱਚ ਦੀ ਪ੍ਰਖਿਆ ਲੈ ਲੈ ਆ ਜਿਹੜੀ ਤੇਰੀ ਪ੍ਰਖਿਆ ਤੇਰੀ ਹਮੇਸ਼ਾ ਵਾਸਤੇ ਤਰਕਤ ਹੋ ਜੇਗਾ ਛਾੜ ਲਿਆ ਸੰਸਾਰਤ ਵਿੱਚ ਪਰ ਉਹਦੀ ਲਈ ਨਹੀਂ ਦਿੱਤਾ ਸੱਚ ਨੂੰ ਕਬੂਲ ਨਹੀਂ ਦਿੱਤਾ ਕੰਨ ਬੇਰੇ ਮਦਰਬ ਦੀ ਗੰਦੀ ਸਮਝ ਨਹੀਂ ਆਈ ਗੱਲ ਦੀ ਗੱਲ ਇਸੇ ਕੀਮਤ ਨੀ ਸਮਝੀ ਉਹਨੇ ਮਾਇਆ ਦੀ ਕੀਮਤ ਸਮਝਦਾ ਸੀ ਮਾਇਆ ਕੌੜਾ ਲੱਗਦਾ ਸੀ ਕਿੱਥੇ ਮਿੱਟੀ ਲੱਗਦੀ ਸੀ ਮਾਇਆ ਮਿੱਟੀ ਲੱਗਦੀ ਸੀ ਠੀਕ ਹੈ ਪਹਿਲਾਂ ਤਾਂ ਏ ਪਛਤਾਇਆ ਫਿਰ ਬਾਅਦ ਚ ਜੇਕਰ ਕੋਈ ਹਲਤ ਕਰ ਰਿਹਾ ਫਿਰ ਕਿਸੇ ਜੇਲੇ ਨੂੰ ਭੇਜ ਕੇ ਬਿਠਾ ਲਿਆ ਉੱਥੇ ਵੀ ਚੁੰਗ ਲੈ ਕੇ ਆਂਦੀ ਨਾ ਸਤੇ ਮਾਤਾ ਸਭੇ ਦੀ ਤਰੀਅ ਉਸ ਹਲਤੇ ਹਾਂ ਜੀ ਪੁੱਤ ਵਿੱਚ ਬਹਾਲਿਆ ਤਾਂ ਕੀ ਪਾ ਬਣਦਾ ਜੀ ਉਹ ਕੋਈ ਚੇਲਾ ਬਠਾਲਦਾ ਆਪ ਤਾਂ ਬੈਠਿਆ ਨਹੀਂ ਸ਼ਰਮ ਦਾ ਮਾਰਿਆ ਗਿਆ ਨਹੀਂ ਸੰਗਤ ਵਿੱਚ ਦੁਬਾਰਾ ਅੱਛਾ ਜੀ ਚੇਲਾ ਪੇਤਾ ਇਹ ਤੋਂ ਸੁਣ ਕੇ ਆ ਮੇਰੇ ਦਰਮਾਚ ਨਹੀਂ ਸੀ ਮੈਂ ਸੁਣੀ ਹੋਈ ਗੱਲ ਮੇਰੇ ਦੀ ਉਹ ਮੈਂ ਤਾਂ ਆਪਰੇ ਜੋੜ ਤੋੜ ਤੋੜਦਾ ਰਿਹਾ ਉੱਤੇ ਬੈਠਾ ਤੁਸੀਂ ਸੁਣ ਕੇ ਆ ਤੇ ਮੈਨੂੰ ਦੱਸੋ ਹੁਣ ਗੱਲ ਕੀ ਹੈ ਆਪ ਦਾ ਅੰਤਾਰੀ ਦੀ ਆਪ ਦਾ ਤਪੱਸ ਦੀ ਸਮਝੀ ਦਾ ਆਪਣੇ ਗੁਰੂ ਬਣਿਆ ਹੈ ਕਿ ਆਪਣੇ ਬਰਾਬਰ ਦੀ ਗੱਲ ਠੀਕ ਹੈ ਜੀ ਪੰਜ ਲੋਕ ਸਭ ਹੱਸਣ ਲੱਗੇ ਤਪਾ ਲੋਬ ਜਿਹੜੇ ਸਿਆਣੇ ਬੰਦੇ ਸੀ ਬੈਠੇ ਉਹ ਹੱਸਣ ਲੱਗੇ ਉਹ ਕਹਿੰਦੇ ਵੀ ਤਪਾ ਆਪ ਨਹੀਂ ਆਇਆ ਅੱਜ ਮੁੰਡਾ ਭੇਜਤਾ ਅਸਲ ਵਿੱਚ ਲੋਭ ਲੈ ਲੈਣੇ ਥਾਰਤਾ ਤਾ ਉਹਦੀ ਸਮਝ ਨਹੀਂ ਆ ਉਹ ਲਹਿਰ ਉਹਦੇ ਅੰਦਰ ਐਂ ਲੋਭ ਲਹਿਰ ਚੁਸਤ ਹੋਵੇ ਤਾਂ ਇਹ ਗਲਸਾਬ ਅੰਦਰ ਐਨੀ ਅੰਦਰ ਮਾਇਆ ਦੀ ਇੱਛਾ ਕਾਮਨਾ ਇੰਨੀ ਪ੍ਰਭਲ ਹੈ ਮਾਨੋ ਦਾ ਟਿਕਦਾ ਹੀ ਨਹੀਂ ਟਿਕੇ ਬਿਨਾਂ ਸੰਸਾਰ ਵਿੱਚ ਜੀਉਂਦੀ ਉਹਦੇ ਇਸ ਕਰਕੇ ਆਪਣਾ ਚੇਲਾ ਭੇਜੇ ਠੀਕ ਹੈ ਜਿਥੇ ਥੋੜਾ ਤਨ ਵੇਖੈ ਤਪਾ ਭਿੱਟੇ ਨਾਹੀ ਤਨ ਬਹੁਤੇ ਜਿੱਥੈ ਤਪੈ ਧਰਮ ਹਾਰਿਆ ਕਿਤੇ ਤਾਂ ਥੋੜਾ ਜਿਹਾ ਤਨ ਉੱਥੇ ਤਾਂ ਉਹ ਫੇਰਦਾ ਬਲੀ ਸੰਤੋਖੀ ਤੋਖਤ ਖੁਸ਼ੂਦਾ ਸੰਤੋਖਤ ਹੋਣਾ ਹੋਈ ਅਸੀਂ ਕਰਨ ਧਰਨ ਤਾਂ ਤਾਂ ਸੰਸਾਰੀ ਆਦਮੀ ਨਾ ਕਬੂਤ ਅਸੀਂ ਲੋਕ ਕੰਮ ਤਾਂ ਤੇਜੀ ਨਾਲ ਰੱਖੋ ਤੁਸੀਂ ਕਬੀਲਦਾਰ ਹੋ ਤੁਸੀਂ ਵਰਤੋ ਤੁਹਾਡਾ ਤੁਹਾਡੇ ਵਾਸਤੇ ਇਹ ਤਾਂ ਉੱਥੇ ਤਾਂ ਇਹ ਕੰਮ ਕਰਦਾ ਜਿੱਤੇ ਬਹੁਤਾ ਕੰਮ ਦੇਖ ਲੈਂਦਾ ਉੱਥੇ ਡੋਲ ਜਾਂਦਾ ਠੀਕ ਹੈ ਜੀ ਡੋਲ ਜਾਂਦਾ ਉੱਥੇ ਜਿਹੜਾ ਗੋਣੋ ਦਾ ਉਹਦਾ ਗੋਣਾ ਨਾ ਜਿਹੜਾ ਉਹ ਡੋਲ ਜਾਂਦਾ ਉੱਥੇ ਥੋੜੇ ਦਸਤੇ ਤੱਕ ਗੋਣ ਖੜਾ ਰਹਿ ਜਾਂਦਾ ਫਿਰ ਉਖਾਲਾ ਬਹੁਤਾ ਕੰਮ ਦੇਖ ਲੈਂਦਾ ਫਿਰ ਗੋਣ ਫੜ ਜਾਂਦਾ ਤੇ ਤੇਰੀ ਯੋਜਨਾ ਉਹ ਤੁਹਾਨੂੰ ਫਿਰ ਲੈ ਲੈਂਦਾ ਭਾਈ ਇਹ ਤਪ ਨਾ ਹੋ ਬਗਲਾ ਹੈ ਮੈਂ ਸਾਧ ਜਨਾ ਵਿਚਾਰਿਆ ਸਾਧ ਜਨਾਂ ਨੂੰ ਵਿਚਾਰਿਆ ਬੈਠ ਕੇ ਕਹਿੰਦੇ ਬਗਲਾ ਹੈ ਬਗਲਾ ਛੋਟੇ ਮੋਟੇ ਜਨੀਆਂ ਜਨਪਰਨ ਬਹੁਤੇ ਛੋਟੇ ਛੋਟੇ ਇਹਦੇ ਨੇੜੇ ਆਉਂਦੇ ਨੇ ਉਹਨਾਂ ਨੂੰ ਨਹੀਂ ਖਾਂਦਾ ਹੈ ਜੇ ਦੇਖਣਾ ਦੇ ਰੱਜਣ ਜੋ ਦੇ ਸਾਈ ਦੀ ਗੋਚਾਂ ਜੋਗੀ ਜਿੱਤੇ ਬਤਲਬ ਦੀ ਉਹ ਮੱਛੀ ਆ ਡੱਡੀ ਨੂੰ ਫੜਦਾ ਛੋਟੀ ਨੂੰ ਨਹੀਂ ਫੜਦਾ ਉਹ ਤੋਂ ਠੀਕ हो ਜੀ ਇਹ ਤਖੇ ਲੋਈ ਆ ਉਹਨੇ ਬਚਾਰਿਆ ਬੈਠ ਕੇ ਸਿਆਣਿਆਂ ਦੇ ਠੀਕ ਹੈ ਜੀ ਤਤ ਪੁਰਖ ਕੀ ਤਪਾ ਨਿੰਦਾ ਕਰੈ ਸੰਸਾਰੇ ਕੀ ਉਸਤਤੀ ਵਿੱਚ ਹੋਵੇ ਇਹ ਇਕੋ ਸਤਪੁਰਖ ਨੇ ਦਿੱਦਿਆ ਕਰਦਾ ਸਤਪੁਰਖ ਨੇ ਦਿੱਦਿਆ ਕਰਦਾ ਉਹ ਐ ਕਰਦਾ ਨਾ ਫਿਰ ਦੇਖੋ ਜੀ ਅੱਜ ਵੀ ਤੂੰ ਅੱਜ ਪਰਮੇਸ਼ਰ ਦੱਤਾ ਹੈ ਪਰਮੇਸ਼ਰ ਦੱਤਾ ਗੱਲ ਠੀਕ ਹੈ ਕਿ ਇਹ ਸਤਪੁਰਖ ਤੇ ਦਿੱਦਿਆ ਹੋਗੀ ਸਾਹਮਣੇ ਜੋ ਧੀਨ ਨੂੰ Papa ਬੋਲਦੇ ਦੀ ਜੋ ਧੀਨਾਂ ਨਹੀਂ ਉਹ ਬੋਲਦੇ ਸਤਪੁਰਖ ਨੇ ਦਿੱਦਿਆ ਹੋਗੀ ਦੇਖੋ ਜੇ ਸਰਕਾਰ ਦੇ ਹੁਕਮ ਦੇ ਨਾਲ ਸਭ ਚੱਲਦਾ ਹੈ ਸਰਕਾਰ ਦੇ ਹੁਕਮ ਦੇ ਨਾਲ ਆ ਫਰਸੀ ਦੇਤੀ ਸਰਕਾਰ ਦੇ ਹੁਕਮ ਉਹ ਕਰਦਾ ਸਾਹਮਣੇ ਦੀਦਾ ਕਰਦਾ ਥਲ ਠੀਕ ਦੀ ਹੈ ਅੱਛਾ ਸਾਡੇ ਲੋਕ ਮੰਦੇ ਦੀ ਸੱਚਪੁਰਖ ਦੀ ਦੱਸਿਆ ਕਰਦਾ ਐਸ ਜੋ ਭੋਕੇ ਭੋਕਾ ਉਹ ਸੱਚ ਕਹਿੰਦਾ ਜੋ ਪਿੱਛੇ ਪਾਣਾ ਵਰਦਾ ਉਹ ਬੁੱਦਦਾ ਪਾਣੀ ਤੋਂ ਬਾਤ ਨਹੀਂ ਹੈ ਸਤਪੁਰਖ ਦੇ ਨੰਦਿਆ ਦੰਦਦਾ ਸਤਪੁਰਖ ਜਿਹਨਾਂ ਨੇ ਸਤਪੁਰਖ ਸਾਨੂੰ ਜਿਹੜੇ ਸਤਪੁਰਖ ਬਚਤ ਕਹਿੰਦੇ ਨੇ ਉਹਨਾਂ ਦੀ ਖਿਲਾਫਤ ਕਰਦਾ ਹੈ ਤਾਂ ਦਾ ਮਤਲਬ ਇਹ ਹੈ ਸਤਪੁਰਖਾਂ ਨੇ ਬਚਨ ਰੂਪ ਦੇ ਬਚਨ ਜਿਹੜੇ ਨੇ ਇਹਨਾਂ ਦਾ ਸਿਖਾਲ ਕਰਦਾ ਇਹਨਾਂ ਦੀ ਦਦਿਆ ਕਰਦਾ ਸਾਰੀ ਲੋਕਾਂ ਦੀ ਉਸਤਿ ਕਰਦਾ ਜੋ ਸੰਸਾਰ ਮੰਦ ਹੈ ਤਾਂ ਉਸਦਾ ਹੀ ਹੈ ਮਨਪਾਪ ਨੂੰ ਸੰਸਾਰ ਮੰਦ ਉਹ ਵੀ ਮੰਦ ਪੁਰਬਾਪ ਨੂੰ ਗੁਰਮਤਿ ਵੱਲਦੀ ਵੀ ਹਾਂਜੀ ਵਿੱਚ ਹੋਵੈ ਏਥ ਦੇਖੈ ਤਪਾ ਦਈ ਮਾਰਿਆ ਇਦਾਂ ਕਰ ਰਿਹਾ ਹੈ ਉਹ ਵਿਰੋਧ ਕਰ ਰਿਹਾ ਹੈ ਸ੍ਰੀਕੇ ਨਾਲ ਇਸ ਕਰਕੇ ਤਪਾ ਦਈ ਮਾਰਿਆ ਤਪਾ ਦਾ ਮਰਨਾ ਹੀ ਮਰਨਾ ਉਹ ਦੁਆਨ ਦੇ ਵਿੱਚੋਂ ਆਂ ਕਰਦਾ ਸੱਚ ਨੂੰ ਪਿੱਛੇ ਛੱਡ ਦਿੰਦਾ ਹੈ ਨੂੰ ਅੱਗੇ ਲੈ ਠੀਕ ਹੈ ਇਹ ਦਲੀਲਾਂ ਦੇ ਕੇ ਇਸ ਤਰੀਕੇ ਦੀਆਂ ਦਲੀਲਾਂ ਦੇ ਕੇ ਸੱਚ ਨੂੰ ਜਿਹੜਾ ਹੈਗਾ ਸੱਚ ਨੂੰ ਰਿਜੈਕਟ ਕਰਦਾ ਹੈ। ਕੋਰਮਾਸਨ ਨੂੰ ਰਿਜੈਕਟ ਕਰਦਾ ਹੈ। ਇਸ ਕਰਕੇ ਤਪਾ ਦੇ ਹੀ ਮਾਰਿਆ ਪਰ ਹੁਕਮ ਨਾਲ ਜਿਹੜਾ ਹੈਗਾ ਮਾਰਿਆ ਜਾਂਦਾ ਤਪੇ ਨੂੰ ਸੱਜੀ ਬਰ ਨਹੀਂ ਮਿਲਦਾ। ਠੀਕ ਕੀ ਨਿੰਦਾ ਦਾ ਵੇਖ ਜੇ ਤਪੇ ਨੂੰ ਫਲ ਲੱਗਾ। ਸਭ ਗਿਆ ਤਪੇ ਦਾ ਘਾਲਿਆ। ਮਾਹਪੁਰ ਖਾਨੇ 'ਚ ਜਿਆਦਾ ਰਲਦਾ ਹੁੰਦਾ ਬਾਹ ਮਾਹਪੁਰ ਖਾਨੇ 'ਚ ਦੁਤੀਆਪਰੀ ਨੇ ਜਾਂਦੀ ਹੈ ਨਾ ਨੇ ਕੀ ਹੈ ਫਤੋ ਬਦੇ ਮਹੱਤਵਪੂਰਨ ਕਰੀ ਜਾਂਦਾ ਹੋਈ ਜਾਂਦੀ ਹੈ ਉੱਥੇ ਦੇਖ ਜਿਹੜਾ ਫੜ ਲੱਗਿਆ ਮਾਹਪੁਰ ਖਾਨੇ ਦੁਤੀਆ ਦਾ ਆਈ ਫੜ ਲੱਗਿਆ ਆਹ ਫਰਕਾਂ ਦੇ ਦਸਿਆ ਤਾ ਫਲ ਜਿੱਦਾਂ ਤਾ ਵੇਸ ਜੇ ਤੱਪੇ ਫਲ ਲਗਾ ਤਾਲਿਆ ਗਿਆ ਤੱਪੇ ਦਾ ਦੀ ਹਾਲਤ ਬਈ ਸਾਰੀ ਢਸ ਗਈ ਆਹ ਫਲ ਲੱਗੇ ਭਾਈ ਚਲਿਆ ਗਿਆ ਤੱਪੇ ਦਾ ਤਪ ਅਜਾਣਿ ਚਲਿਆ ਗਿਆ ਇਹ ਭਾਈ ਫਲ ਲੱਗਾ ਠੀਕ ਹੈ ਬਾਹਰ ਬਹਿ ਪੰਚਾਂ ਤਪਾ ਤਪੱਸਦਾਏ ਅੰਦਰ ਬਹਿ ਤਪਾ ਪਾਪ ਕਮਾਏ ਬਾਹਰ ਪੱਤਿਆਂ ਵਿੱਚ ਮੈਂ ਤਪਾ ਤਪਾ ਸਦੋਂ ਮੈਂ ਤਪੰ ਉੱਧਰ ਜਾਂ ਕੱਲਾ ਚੱਲਿਆ ਜਾਂਦਾ ਹੈ ਕਿ ਆਪਰੇ ਉੱਧਰ ਜੁੜ ਜਾਂਦਾ ਹੈ ਪਾਪ ਕਮਉਂਦਾ ਹੈ ਕੀ ਕਮਉਂਦਾ ਹੈ ਉੱਥੇ ਦਾ ਵਿਰੋਧ ਕਿਵੇਂ ਕਰਨਾ ਉੱਥੇ ਦਲੀਲਾਂ ਘੜਦਾ। ਕੋਈ ਮਤਦੇ ਬਰੋਜ਼ ਕਰਦੀ ਹੈ ਤਲੀਲਾਂ ਘੜਦਾ। ਇਹ ਪਾਪ ਖਰੂਬਦਾ। ਠੀਕ ਹੋ। ਪਾਪ ਹੈ। ਤੁਹਾ ਆਪਣੀ ਸੋਚ ਹੈ ਜਿਹੜੀ ਸੱਚੀਆਂ ਪਾਪ ਹੈ। ਥੋੜ੍ਹ ਦਲੀਲਾਂ ਘੜ ਰਿਹਾ ਹੈ। ਨੂੰ ਪਰੂ ਪੈ ਕੇ ਐਸੀ ਦਲੀਲਾਂ ਦਊਗਾ ਗੁਰੂ ਘਰ ਤੋਂ ਖਰਾਬ ਤਾਂ ਕਿ ਗੁਰੂ ਘਰ ਨਾਲ ਲੋਕ ਜੁੜ ਜੇ ਦੀ। ਹੈ। ਅੱਛਾ ਅਰ ਅੰਦਰਲਾ ਪਾਪ ਪੰਜਾਂ ਨੂੰ ਉੱਗਾ ਕਰ ਵਿਖਾਲਿਆ ਧਰਮ ਰਾਏ ਜਮ ਕੰਕਰਾਂ ਨੇ ਆਖ ਛੱਡਿਆ ਇਸ ਤਪੇ ਨੂੰ ਤਿੱਥੇ ਖੜ ਪਾਇਓ ਜਿੱਥੇ ਮਹਾ ਉਹ ਪੰਥਿਆ ਨੂੰ ਦੱਸ ਦਿੰਦਾ ਦੂਏਨਾਂ ਨੂੰ ਜੋ ਵੀ ਪਲੈਨਿੰਗ ਬਣਾਉਂਦਾ ਸੱਚ ਤੇ ਖਰਾਬ ਸਮਝਾਉਂਦੀ ਦੂਜੇ ਤੇ ਦੂਨਾ ਸਮਝਾਉਦਾ ਦੱਸਦਾ ਹੈ ਜਿਵੇਂ ਇਤੋ ਗੁਰੂ ਘਰ ਦੇ ਵਿੱਚ ਸ੍ਰੀ ਚੰਦ ਕੇ ਤਫੇਸੀ ਸਾਰੇ ਪੰਥ ਨੇ ਇਹ ਇੰਨਾ ਕਰਦਾ ਅੱਛਾ ਪੰਨਸ ਸਫੇਸ਼ੀ ਚੰਦ ਜੇ ਗੁਰੂ की ਗੱਲ ਤਾਂ ਨਹੀਂ ਵੰਦੇ ਉਹ ਇਦਾਂ ਕਰਦੇ ਰਹੇ ਨੇ ਪੰਡਤਾਂ ਦੇ ਨਾਲੇ ਆਪਰੇ ਪੰਡਤ ਮੂਰੇ ਉਹਦਾ ਹੁਦ ਆਪਸਾਂ ਨੇ ਪੰਡਤ ਪੰਡਤਾਂ ਰਾਹੇ ਤਪੇ ਉਹ ਸਾਡੇ ਕਰਾਣ ਲੋਕਾਂ ਨੂੰ ਕਹਿਣ ਉਹ ਜੀ ਬਹੁਤ ਮਹਾਂਪੁਰਸ਼ ਨੇ ਇਹ ਹੈ ਉਹ ਪੂਰੇ ਤਪਿਆਂ ਨੂੰ ਕਰਕੇ ਰੱਖਦੇ ਜਿੱਥੇ ਮਹਾ ਮਹਾ ਹੱਤਿਆ ਰਿਆ ਸਰਵਰਾਇ ਨੇ ਜੇ ਕੰਮ ਕਰਾਂ ਨੂੰ ਪੁੱਛਿਆ ਆਖਿਆ ਇਹ ਆਖਛਿਆ ਇਸ ਤਪੇਂ ਕਿੱਥੇ ਖੜ ਪਾਇਓ ਜਿੱਥੇ ਵਾਹ ਵਾਹ ਹੱਤਿਆ ਇਸ ਤਪੇ ਨੂੰ ਨਾ ਚੰਦੇ ਹੋ ਕਤੇ ਗੈਰ ਜਗਤਿਓ ਜਿੱਥੇ ਮਹਾ ਹੱਤਿਆ ਰੇਣਾ ਜਿਲੇ ਬਾਹ ਤਿਆਰੇ ਹੁੰਦੇ ਨੇ ਉਹ ਕੱਲੇ ਬੰਦੇ ਹੁੰਦੇ ਨੇ ਚੱਕੀ ਉਹਦੇ ਜਿਹਨੂੰ ਫਾਂਸੀ ਹੋ ਜਾਂਦੀਆਂ ਹਾਂਜੀ ਉਹਨੂੰ ਕਬਰਾਂ ਹੁੰਦਾ ਹੈ ਦੇ ਵਿੱਚ ਚੱਕੀ ਕਹਿੰਦੇ ਛੋਟਾ ਜਿਹਾ ਕਬਰਾਂ ਹੁੰਦਾ ਉਹਦੇ ਵਿੱਚ ਰੱਖਿਆ ਕੱਲੇ ਨੂੰ ਗੱਲਬਾਤ ਕਰ ਸਕੇ ਉੱਥੇ ਬੰਦਿਆਂ ਨੇ ਹਟਣਾ ਉਲਟਾ ਸਭ ਕੁਝ ਪੜਉਂਦੇ ਬਾਹ ਤਿਆਰੇ ਇਹਨੂੰ ਦੇੜ ਜਿਮੀ ਕੱਲਾ ਰੱਖਦੇ ਨੇ ਇਹਨੂੰ ਕੱਲਾ ਰੱਖਿਓ ਦੂਏ ਨਾਲ ਗੱਲਬਾਤ ਕਰ ਸਕੇ ਇਹਦੀ ਪੁੱਠੀ ਪੜਾਈ ਦਾ ਇਹਨੂੰ ਪਤਾ ਲੱਗੇ ਤੇਰੇ ਵਿਚਾਰੂ ਗਾ ਵੀ ਤੈਨੂੰ ਅਲੱਗਾ ਰੱਖਿਆ ਹੋਗਾ ਤੇ ਇਕੱਠੇ ਦੇ ਸਾਰੇ ਇਹ ਸਜਾ ਹੈ ਦੀ ਉਹਨੂੰ ਸਮਝਾਇਆ ਭਾਈ ਇਹਨੂੰ ਕੱਲ੍ਹਾ ਰੱਖਿਓ ਠੀਕ ਹੈ ਨਹੀਂ ਕਰਦਾ ਇਹ ਉਲਟੀ ਤੇ ਆਰਿਆਂ ਨੂੰ ਅਲੱਗ ਕਮਰੇ ਜੇ ਰੱਖਦੇ ਹੁੰਦੇ ਨੇ ਜਿਹੜੇ ਵਿੱਚ ਉੱਥੇ ਰੱਖਿਓ ਠੀਕ ਹੈ ਜੀ ਫਿਰ ਇਸ ਤਪੇ ਦੇ ਮੂੰਹ ਕੋਈ ਲੱਗੋ ਨਹੀਂ ਇਹ ਸਤਿਗੁਰ ਹੈ ਫਟਕਾਰਿਆ ਉਹ ਬੇ ਸਤਗੁਰ ਦਾ ਫਟਕਾਰਿਆ ਹੋਇਆ ਫਿਰ ਇਹਦੇ ਮੂੰਹ ਨਹੀਂ ਲੱਣਾ ਕੋਈ ਇਹਨਾਂ ਬਲਵਾਂ ਨਹੀਂ ਗਲਬੀ ਜੇ ਸਨ ਇਹਨੂੰ ਚੁੱਪ ਕਰਕੇ ਹੀ ਰੋਟੀ ਪਾਣੀ ਦੇਆ ਸੀ ਬੋਲਣਾ ਸੀ ਬਸ ਇੱਜ਼ਤ ਕਰਦੀ ਹੈ ਇਹਨੂੰ ਤਬਾ ਨਹੀਂ ਕਰਦੇ ਜੇ ਜਿੰਨੇ ਹੋਵੇ ਵੀ ਰਾਤਰੀ ਤੜੀਰ ਮਹਿਸੂਸ ਹੋਣਾ ਵੀ ਫੇਰੀ ਰਾਤਰੀ ਆਮ ਆਦਮੀ ਤੋਂ ਜ਼ਿਆਦਾ ਹੈ ਤੇ ਮੇਰੀ ਬੇਦਰਰੀ ਹੈ ਸਾਰਿਆਂ ਨਾਲੋਂ ਜ਼ਿਆਦਾ ਮੈਂ ਦਾ ਤਫਾਸੀ ਤਪ ਕੀਤਾ ਸੀ ਇਹ ਲੋਕ ਤਾਂ ਮੇਰੇ ਕਿੰਨੇ ਸੀ ਇਹਨਾਂ ਦਾ ਆਦਰ ਮੇਰੀ ਦਾਸਤਰੀ ਹੈ ਸ਼ਾਇਦ ਫਿਰ ਇਸ ਦੇ ਵਿੱਚ ਉਹਨੂੰ ਗਿਆਨ ਆ ਇਹਨੂੰ ਬੋਧਾ ਲੱਗਦਾ ਤੇਰੀ ਦਾਸਤਰੀ ਦਾ ਕਾਰਨ ਕੀ ਹੈ ਉਸ ਵੇਲੇ ਦਾ ਤਰਫ ਦਾ ਪ੍ਰਚਾਰ ਕਰਦਾ ਸੀ ਆਪਣੇ ਜਾਂ ਦੇ ਹੋ ਕੇ ਆਪਣੇ ਆਪ ਨੂੰ ਧਾਰਮਿਕ ਸਮਝਦਾ ਸੀ ਉਹ ਰੱਬ ਵੀ ਆਪਣੇ ਆਪ ਨੂੰ ਧਰਮ ਨੂੰ ਸੀ ਜ਼ੁਲਮ ਵੀ ਕਰਦਾ ਸੀ ਪਰ ਧਰਮ ਦਾ ਇਸਲਾਮ ਦੀ ਸੇਵਾ ਕਰਦਾ ਸੀ ਉਹ ਵੀ ਸੇਵਾ ਕਰਦੇ ਨੇ ਪਰ ਉਹ ਅੱਗੇ ਜਾ ਕੇ ਪਤਾ ਲੱਗਦਾ ਸੇਵਾ ਕਰਦੇ ਨੇ ਕੀ ਕਰਦੇ ਨੇ ਤੇ ਜਾ ਕੇ ਪਤਾ ਲੱਗਿਆ ਨਾ ਸੇਵਾ ਕਰਦਾ ਸੀ ਕੀ ਕਰਦਾ ਸੀ ਉਹ ਤਾਂ ਅੱਗੇ ਜਾ ਕੇ ਪਤਾ ਲੱਗੂ ਇੱਕ ਆਸੀਂ ਆਪ ਮੰਨ ਲਿਆ ਨਾ ਆਪ ਮੰਨ ਲਿਆ ਨਾ ਸੇਵਾ ਕਰਦੇ ਨੇ ਹਾਂਜੀ ਰਾਜ ਦੇ ਦਾ ਖਾਲਸਾ ਵੀ ਸਭ ਨੇ ਨੇ ਸੇਵਾ ਕਰਦੇ ਕਹਾਂ ਜਾਂਦੇ ਪਤਾ ਲੱਗੂ ਸੇਵਾ ਕਰਦੇ ਹਨੀ ਕਰਦੇ ਇੱਥੇ ਤਾਂ ਸਾਡੇ ਆਪਣੇ ਫੇਸ ਦੇ ਹਰ ਕੇ ਸੋ ਨਾਨਕ ਆਖ ਸੁਣਾਇਆ ਜੋ ਦਈ ਸਵਾਰਿਆ ਦੇਖੋ ਜੋ ਕੁਝ ਅਸੀਂ ਕਹਿੰਦੇ ਪੁਪਤੀ ਪਿੱਛੇ ਲਿਖ ਦਿੱਤੀ ਕਿਸੇ ਦੇ ਖਿਲਾਫ ਨਹੀਂ ਲਿਖਿਆ ਕਿਸੇ ਨਾਲ ਈਰਖਾ ਕਰਕੇ ਨਹੀਂ ਲਿਖਿਆ ਕਿਸੇ ਨੂੰ ਵੈਰ ਕਰਕੇ ਜੀ ਲਿਖੀਓ ਇਹ ਜੋ ਹਰ ਕੇ ਦਰਦ ਭਰਤਿਆ ਸਾਥੇ ਜਿਵੇਂ ਬੁਲਾਇਆ ਉਹ ਕੇ ਲਿਖ ਲਿਖਾਇਆ ਬੁਲਾਇਆ ਹੀ ਲਿਖਾਇਆ ਅੱਖਰ ਅੱਖਰ ਉਹ ਲਿਖ ਦਿੱਤਾ ਠੀਕ ਹੈ ਹਰ ਕੇ ਦਰਦ ਜੋ ਭਰਤੇ ਆ ਇਹ ਤਾਂ ਲਿਖਿਆ ਐਸੀ ਤਾਂ ਕਿ ਲੋਕਾਂ ਨੂੰ ਸਮਝ ਆ ਜਵੇ ਇਹ ਕਬ ਲੋਕ ਜੇਰਾ ਦਹਾਜਾ ਦੇ ਗਿਆਨ ਹੋਣਾ ਉਹ ਇੱਥੇ ਹੀ ਆਜਵੇ ਤੁਹਾਨੂੰ ਠੀਕ ਹੈ। ਕਾਹੇ ਤੁਹਾਡੇ ਨਾਲ ਉਹ ਜਿਆਨ ਹੋਵੇ ਜੇ ਇਹ ਤਾਂ ਫੇਰ ਨਾਲ ਹੁੰਦਾ। ਇਹਨੂੰ ਦੂਸਰੇ ਸਾਥ ਵਿੱਚ ਮਤਲਬ ਇਹ ਹੈ। ਇਹ ਕਿਸੇ ਨੇ ਇਲਕਾ ਕਰਕੇ ਲਿਖਿਆ ਜਾਂ ਕਿਸੇ ਨੂੰ ਦੋਸ਼ ਕਰਕੇ ਲਿਖਿਆ। ਐਸਾ ਕੁਝ ਨਹੀਂ। ਸਤੋਂ ਬਚਿਆ ਵਾਸਤੇ ਲਿਖਿਆ ਹੈ। ਸੱਜੇ ਜੀ ਆਨੇ ਹੈ ਕੀਤਾ ਹੈ ਉਹ ਆ ਹੋਇਆ ਦਹਾਂ ਉਪਾਈ ਨਾ ਕਰਿਓ ਇਹ ਪਛਣ ਲੈ ਕਿ ਕਹੈ ਨਾ ਨਹੀਂ ਮਨਾ ਹਰ ਭਗਤਾ ਹਰ ਆਰਾਧਿਆ ਹਰ ਕੀ ਹਰ ਭਗਤ ਨਿਤ ਗਾਵਦੇ ਹਰ ਨਾਮ ਸੁਖਦਾਈ ਹਰ ਭਗਤਾ ਹਰ ਆਰਾਧਿਆ ਹਰ ਹਰ ਕੇ ਭਗਤਾ ਦੇ ਰਾਜਾ ਜੇ ਕਰਦੀ ਹਰ ਕੀ ਵਡਿਆਈ ਜਾਹਰ ਕੀ ਵਧਾਈ ਕਰਦੀ ਹੈ ਜਾਂ ਹਰ ਕੀ ਰਾਗਾਂ ਕਰਦੀ ਹੈ ਹਰ ਜੀਵ ਤਨ ਭਗਤਾਂ ਦੇ ਤਗਾਂ ਦੇ ਹਰ ਨੂੰ ਸੁਖ ਦਾਈ ਜਿਹੜੇ ਹਰ ਕੀ ਭਗਤ ਨੇ ਕੀਰਤੀ ਕਰਦੇ ਨੇ ਹਸ ਹਰ ਨਾਮ ਸੁਖ ਕਿਉਂਕਿ ਕੀਰਤੀ ਜੋ ਉਹਨਾਂ ਨੂੰ ਦੱਸੇ ਸੁਖਦਾਈ ਦੋ ਬਿੰਦੈ ਕੀਤੀ ਜੋਂਨ ਨੂੰ ਸੁਖ ਮਰਦਾ ਠੀਕ ਹੈ ਜੀ ਹਰ ਭਗਤਾ ਨੂੰ ਨਿਤ ਨਾਵੇ ਦੀ ਵਡਿਆਈ ਬਖਸ਼ੀਐ ਨਿਤ ਚੜ੍ਹੈ ਸਵਾਈ ਹਰ ਭਗਤਾ ਨੂੰ ਥਿਰ ਘਰੀ ਬਹਾਲੀਐ ਆਪਣੀ ਪੈਜ ਰਖਾਈ ਹਰ ਭਗਤਾ ਨੂੰ ਨਿਤ ਨਾਲਾ ਦੀ ਵਡਿਆਈ ਬਖਸ਼ੀਐ ਪਰਮੇਸ਼ਰ ਦੇ ਹਰ ਕੋ ਕਾਜੂ ਦੇ ਤਰ ਦੋਬੀਤੀ ਬੜੀ ਦੋਬੀਤਾ ਨੂੰ ਵੀ ਕੀਤੀ ਹੈ ਕਮਿਤਾ ਨੂੰ ਵੀ ਵਡਿਆਈ ਰੈਪਿਟੇਸ਼ਨ ਨਹੀਂ ਚੱਲਦਾ ਇਹੋ ਪਖਸ਼ੀਆਂ ਰੋਜ਼ ਨਾ ਵੀ ਬਖਸ਼ਦਾ ਠੀਕ ਹੈ ਜੀ ਜਿੱਤ ਅੱਜ ਨਾਲੋਂ ਕੱਲ ਦੀ ਗੱਲ ਤੇ ਸਵਾਇਆ ਗਿਆ ਅੱਜ ਜਿੰਨਾ ਗਿਆ ਦਿੱਤਾ ਕੱਲੋਂ ਉਦੋਂ ਵੱਧੇ ਮਿੱਠਾ ਜਿਹਾ ਤਖਿਆ ਦੀ ਮਿੱਠਾ ਸੱਚ ਤਖਿਆ ਦੀ ਚਲੇ ਸਬਾਈ ਹਰ ਭਗਤਾ ਨੂੰ ਫਿਰ ਕਰੀਂ ਬਹਾਰ ਬਹਾਲੇਨ ਅਪੜ ਆਪਣੀ ਪੈਗ ਜਿਹੜੇ ਹਰਕੇ ਭਗਤ ਦੀ ਹੁੰਦਾ ਨਾ ਦਿਖਾ ਕੇ ਫਿਰ ਕਰਕੇ ਆਪਣੇ ਆਪਣੇ ਘਰ ਕੋ ਸਾਫਤਾ ਆਪਣੇ ਕਰਤਾ ਫਿਰ ਕਰਤਾ ਇਹ ਨਾਮ ਦੀ ਵਡਿਆਈ ਹੈ ਤਾਂ ਵਡਿਆਈ ਹੈ ਨਾਮ ਦੀ ਇਹਨੇ ਵੀ ਅਰਗੇ ਭਗਤ ਨੇ ਹੈਗੇ ਟਾਈਮ ਚਾਹੇ ਕਰੋੜਾ ਹੋਣ ਪੱਠੇ ਫਿਰ ਤੋਂ ਹੋ ਜਾਂਦੇ ਇਹ ਨਹੀਂ ਵੀ ਇਹਦਾ ਟੀਕਾ ਲੱਗਿਆ ਆ ਬਈ ਉਹ ਟੀਕਾ ਲੱਗ ਤੇਰੇ ਸਾਰੇ ਫਿਰ ਹੋ ਜਾਂਦੇ ਇੱਕ ਗੱਲ ਸੁਣ ਕੇ ਸਾਰੇ ਇਕੱਠੇ ਫਿਰ ਹੋ ਜਾਂਦੇ ਠੀਕ ਹੈ ਆਪਣੀ ਪਹਿਚ ਰਖਾਈ ਆਪਣੀ ਪਹਿਚ ਦਿਖਾਈ ਆਪਣੀ ਪਹਿਚ ਠੀਕ ਹੈ ਆਪਣੀ ਜੋ ਬਹਿਲਾ ਕੀਤਾ ਸੀ ਪੂਰਾ ਹੋ ਗਿਆ ਪ੍ਰੈਜ਼ ਰਖੀ ਗਈ ਨਿੰਦਕਾ ਪਾਸੋਂ ਹਰ ਲੇਖਾ ਮੰਗ ਸੀ ਬਹੁਤ ਦੇ ਸਜ਼ਾਈ ਜਿਹਾਂ ਨਿੰਦਕ ਆਪਣੇ ਜੀ ਕਮਾਉਂਦੇ ਤੇ ਉਹ ਫਲ ਪਾਈ ਜਿਸ ਪਾਸੋ ਪਾਸੋਂ ਲੇਖਾ ਤੁਕਿਆ ਜਾਂਦਾ ਨਿੰਦਕ ਨੇ ਗੁਰੂ ਘਰ ਦੇ ਵਿਰੋਧੀ ਨੇ ਉਹਨਾਂ ਪਾਸੋਂ ਹਾਲ ਦੇਖਾ ਹੁੰਸੀ ਉਹ ਦੇ ਸਜਾਈ ਜੇ ਲੇਖ ਨਹੀਂ ਦਿੰਦੇ ਫਿਰ ਸਜਾਉਂਦੇ ਹੀ ਆ। ਜੀ ਆਨਿਤ ਕਪੜ ਜੀ ਕਮਾਬ ਦੇ ਤੇ ਉਹ ਪਾਈ ਇਹੋ ਜਆ ਇਸ ਤੇ ਜੇ ਹੋ ਜਾ ਆਪਣੀ ਦੇ ਵਿੱਚ ਸੋਚਦੇ ਕਿ ਕਮਾਬ ਦੇ ਤੇ ਕੋ ਜੀ ਕਮਾਬ ਦੇ ਲਫ਼ਜ਼ ਆਇਆ। शरीर ਤਾਂ ਕਿਹਨੀ ਕਮਾਬ ਦੇ ਜੀ ਕਮਰੂਪ ਦੇ ਜੀ ਵਿੱਚ ਬਨ ਵਿੱਚ ਕਮਾਬ ਨੇ ਜੋ ਸੋਚਦੇ। ਤੇ ਉਹ ਫੜ ਪਾਈ ਹੋ ਜਾਈ ਫੜ ਬਣ ਜਾਂਦਾ। ਸੁਦਰ ਘਮਲੂ ਸਾਖਪੁਰ ਉਪਰੇ ਪਾਹਾਂ ਕੋਈ ਬੈ ਛੱਤੀ ਵਿੱਚ ਸੁਭਾਈ ਕਹਿੰਦੇ ਛੱਤੀ ਵਿੱਚ ਬੈਠ ਕੇ ਅੰਦਰ ਘੋਰਾ ਪੱਟ ਕੇ ਆਪਣੇ ਆਪ ਨੂੰ ਦੱਬ ਲਵੇ ਕੋਈ ਰਸਤਾ ਨਾ ਰਹਿਣ ਦੇਵੇ ਅੰਦਰ ਬੈਠੇ ਵੀ ਕੋਈ ਸੋਚ ਲਵੇ ਕਮਾਲ ਬੇ ਉਹ ਬਾਹਰ ਉਗੜੇ ਸਾਰੰਬੱਲਾ ਸੋਚਿਆ ਹੈ ਬਾਹਰ ਘੜਿਆ ਉਹਨੂੰ ਕੋਈ ਨਾ ਆਇਆ ਸੀ ਉਪਰ ਦਾ ਕਮਾਈ ਜਨ ਨਾਨਕ ਦੇਖ ਵਿਗਸਿਆ ਹਰ ਵਡਿਆਈ ਜਨ ਨਾਨਕ ਦੇਖ ਵਿਰਸਿਆ ਹਰ ਵਡਿਆਈ ਜਦ ਨਾਨਕ ਕੇਵਾਂ ਵਿਰਸੇ ਨਾਨਕ ਵਿਰਸਿਆ ਹਰ ਕੀ ਵਡਿਆਈ ਦੇਖ ਤਿਸ ਤੇ ਕਮਬੜਿਆ ਪਕਿਆ ਹਰ ਹਰ ਕੀ ਵਡਿਆਈ ਦੇ ਕੇ ਦਿੱਸਨੂੰ ਰਾਸ ਨਹੀਂ ਆਈ ਉਹ ਪਜਮੂਆ ਹਰ ਕੀ ਵਡਿਆਈ ਦੇ ਕੇ ਸੁਮਤੇ ਨਾਲ ਤੋਂ ਵਿਗਸਿਆ ਜਿਸ ਜਿਆਨਾ ਹੁੰਦਾ ਸਰ ਵਿਆਪੀ ਹੋ ਜਾਂਦਾ ਠੀਕ ਹੈ ਦਾ ਵਿਕਾਸ ਅਤੇ ਤਾਂ ਵਿਕਾਸ ਨੂੰ ਵਿਕਾਸ ਵਿਕਾਸ ਉਹ ਮਾਇਆ ਦੇ ਵਿੱਚ विदास माया तो परे तक चला गया तो परे तक दिख विदास है गौरव माया तो भी चला गया फेड़ा खुशी फेड़ा भगत जना का राखा हर आप है क्या पापी करिए गुमान करें मूढ़ गुमानियां ਿਸ ਖੰਡ ਦੀ ਮਰੀਏ। ਸਾਹਿਬ ਜੀ ਨੇ ਨਾ ਰੱਖਿਆ ਹਰ ਆਪੇ। ਸਾਹਿਬ ਜੀ ਨੇ ਨਾ ਰੱਖਿਆ ਹਰ ਆਪੇ। ਆਪੇ ਰੱਖੇ ਤੇ ਭਾਰੇ ਕੌਣ ਨੂੰ? ਖਤਰਾ ਕੀ ਤੋਂ? ਪਾਪੀ। ਕਿਆ ਪਾਪੀ ਕਰੀਏ? ਪਾਪੀ ਕੀ ਭਾਰ ਸਕਦੇ ਜੀਦਾ? ਪਾਪੀ ਤਾਂ ਚੱਕ ਭਾਰ ਦੇਗੇ। ਤਾਪੀ ਜਿਹਨੂੰ ਦਾ ਰਾਖਾ ਆਪਹੁ ਕਭ ਹੋਵੇ ਜਾਦੂ। ਤਾਪੀ ਕੁਛ ਵੀ ਵਿਗਾੜ ਸਕਦੇ ਚੱਕ ਮਾਰਦੇ ਨੇ ਉਹਨਾਂ ਨੂੰ ਪਰਮ। ਤਾਪਿਆਂ ਨੂੰ ਪਰਮ ਆਸੀ ਕੁਛ ਵਿਗਾੜ ਸਕਦੇ। ਗੁਮਾਨ ਕਰੇ ਮੂੜ ਗੁਮਾਨੀਆਂ ਵਿਸ਼ਖਾਦੀ ਮਰੀਏ। ਗੁਮਾਨ ਕਰਦੇ परमाणु वे घुमाने दीदा ठीक है घुमा कर ओड़ वो बांधियो फिर खादी मरी है और ज्यों जहर खा के कोई मर जाता है ऐ जई हादसा है वो एदा ਪਰਮ ਨਾਲ ਤਨ ਮਾਰੀ ਜਾਂਦੀ ਹੈ ਜਿਵੇਂ ਵਿਸ਼ ਨਾਲ ਪਰ ਜਾਂਦਾ ਸਰੀਰ ਅਕਲ ਮਾਰੀ ਜਾਂਦੀ ਹੈ ਗੁਮਾਨ ਕਰਦੇ ਗੁਮਾਨ ਦਾ ਖੁਦੀਆਂ ਨਾਲੇ ਕਹਿਣਾ ਨੇ ਖੁਦਾ ਦਾ ਬੈਰ ਹੁੰਦਾ ਡਾੜੇ ਕਰਦੇ ਆਪ ਐਸੀ ਖੇਡ ਵਰਤੀ ਹੈ ਠੀਕ ਹੈ ਜੀ ਪਰ ਦੇ ਆਏ ਲੱਗੇ ਨਹੀਂ ਦੇ ਥੋਰੜੇ ਜਿਉ ਪੱਕਾ ਖੇਤ ਲੁਣੀਐ ਇਹੇ ਕਰਮ ਕਮਾਉਂਦੇ ਤੇਵੇ ਹੋ ਪਣੀਐ ਬਸ ਦਿਲ ਕੰਦੇ ਨੇ ਥੋੜੇ ਨੇ ਨੇ ਤੇ ਕੰਨਾ ਕਦੋਂ ਹੁੰਦੇ ਨੇ ਜੇ ਖੇਤ ਦੇ ਸਮੇਂ ਮਾਲਕ ਦੀ ਮਰਜ਼ੀ ਐ ਮਾਲਕ ਦੀ ਮਰਜ਼ੀ ਐ ਪੱਕਾ ਖੇਤ ਨਹੀਂ ਆ ਥੋੜੇ ਦਿਨ ਹੁੰਦੇ ਨੇ ਇਹ ਗਵਾਨ ਦੇ ਥੋੜੇ ਨੇ ਗਵਾਨੀਆਂ ਦੇ ਬਹੁਤੇ ਦੱਤੀ ਹੁੰਦੇ ਜਿਹੜੇ ਵੱਡੇ ਬਿਮਾਨੀ ਹੁੰਦੇ ਨੇ ਨੇ। ਜੇ ਤਲਵਾਰ ਚੱਲੀ ਸੀ ਰੂਵੇ ਬਾਦਸ਼ਾਹ ਤੇ ਥੋੜੀ ਗਏ ਸੀ ਕਿ ਤੇ ਹਮਲਾ ਹੋਇਆ ਤਾਂ ਜਾਂ ਤਾਂ ਬਿਲਕੁਲ ਹੋ ਜਾਂਦੀ। ਸਾਰੇ ਨੁਕਸਾਨ ਦੇਣਾ ਬੈਠਾ ਕਰ ਲਿਆ ਸੀ ਰੰਗਦੇਵ। ਜੋ ਨੁਕਸਾਨ ਬੈਠਾ। ਤੁਸੀਂ ਚੜਦੇ ਹੋ। 16 ਸਫਾਈ ਦੇ ਚਲਾਇਆ ਜੋ ਇਹ ਕਰਮੋ ਸੋਚਦੇ ਰਹਿਣਾ ਉਹੀ ਜੀ ਬੋਲਦੇ ਨੇ ਜੋ ਅੰਦਰ ਸੋਚਦੇ ਨੇ ਉਹੀ ਤੋਂ ਉਹਦਾ ਬੋਲ ਹੁੰਦਾ ਉਹੀ ਤਾਂ ਆਵਾਜ਼ ਹੁੰਦੀ ਹੈ ਬੜੀਏ ਬੜੀ ਕੋਲਾ ਜੇ ਇਹ ਕਰਮ ਕਮਤਤ ਉਸਤਾਨ ਮੱਕਾ ਮਾਹਵਦੇ ਇਹ ਲਫਜ਼ ਆਇਆ ਨਾ ਇਹ ਅੰਦਰ ਹੈ ਠੀਕ ਹੈ ਸੋਚੇ ਬਸ ਸੋਚਦੇ ਰਹਿਣਾ ਤੇ ਉਹ ਬੋਲਦੇ ਨੇ ਜਿਹੜੇ ਫਿਰ ਬੋਲਦੇ ਨੇ ਉਹੀ ਕਰ ਫਿਰ ਕਰਦੇ ਨੇ ਜਾਤਿਵਾਦ ਪ੍ਰੈਕਟੀਕਲ ਫਿਰ ਦੂਜੇ ਜਨ ਨਾਨਕ ਦਾ ਖਸਮ ਵੱਡਾ ਹੈ ਸਭ ਨਾਂ ਦਾ ਧਨੀ ਹੈ ਜੇ ਨਾਨਕ ਦਾ ਖਸਮ ਬਹੁਤ ਵੱਡਾ ਹੈ ਸਾਰਿਆਂ ਨੂੰ ਉਹ ਸਭ ਆ ਗਏ ਸਾਰਿਆਂ ਦਾ ਹੀ ਮਾਲਕ ਅणि ਬਾਲਕਨ ਨਗਰਤਾ ਨਹੀਂ ਹੈ ਠੀਕ ਹੈ